संत का निंदक महाअत्ताई संत का दृष्टक महाआत्ताई संत का यह निंदक महाआत्ताई बड़ा आ अत्याचारी है अत्ताई अत्याचारी बहुत बड़ा अत्याचारी होता है संत का ਉਹ ਕਭ ਕਰਦਾ ਸੰਤ ਗਾਣੇ ਦੇ ਕੋਤਾ ਵੀ ਜਿਹੜਾ ਲੋਕਾਂ ਨੂੰ ਮੋਕ ਕੇ ਭਾਰਦਾ ਹੈ ਅਰ ਜੀਨ ਸਾਫ ਕਰਦੇ ਕਰੀਏ ਉਹ ਤਾਂ ਕਹਾਣੀਾਂ ਵਿੱਚ ਪੈ ਗਿਆ ਤਾਤੇ ਉਤਪ ਕਰੋ ਸਤਿ ਸ਼੍ਰੀ ਅਕਾਲ ਨਾ ਨਹੀਂ ਕੱਢ ਬਸ ਬੁਰਾ ਹੋ सहाई एक बकरे नु स्प्रे संचर मुक्त करदा है मुक्ति दे रहे है कोई छिपे नुकसान नहीं कर रहा ए आखरी चढ़े हुए कौड़ी नु कई जरूर छले सदे है मुक्ति निकालया कई झूठ ना हो दे रहे है। सागत कई हो झूठ नाच पा रहे ओ झूठ तो छटकारा करा रहे है। ਉਹ ਜੂਮ ਤੋਂ ਹਟਦਾ ਰਹ ਉਹਨੇ ਘੜਾਤਾ ਕਹਾਹ ਬਾਨ ਉਹ ਮੈਂ ਕੁਝ ਵੀ ਬਗਾੜਿਆ ਨਹੀਂ ਉਹਦਾ ਇਹ ਬਗਾੜਿਆ ਨਾ ਸੱਤਾ ਨੇ ਕਈ ਜਨਮ ਇਹਨੂੰ ਆਦਿ ਦਾ ਕਰਕੇ ਕਈ ਥਲੇ ਕਈ ਕਿੰਨਾ ਸਾਲਾਂ ਦੀ 700 ਸਾਲਾਂ ਦੀ ਜੜ ਹੋਰ ਬੰਦੀ ਇਹਨੂੰ ਹੋਏ ਪਾਪਾਂ ਕਰ ਕਿੰਨੇ ਹਜ਼ਾਰ ਸਾਲ ਛੋੜ ਦਿੱਤਾ ਥਲੇ ਫੇਰ ਆਉਂਦੇ ਸੱਤਾਂ ਬਾਜਾ ਤੇ ਸਿਕਦਾਰਾਂ ਇੰਨਾ ਪੜਿਆ ਨੋ ਫਾਈ ਲੱਗੀ ਜਾਤ ਭਾਰਨ ਨੇ ਲੋਕ ਬਹੁਤ بڑے abrādīl ਤਾਂ ਗਾ ਤਾਂ ਤੇ ਉੱਤਮ ਖਣੋ ਸਿਰਦਾਰ ਜਿਨ੍ਹਾਂ ਕੋ ਕਹਿਣ ਨੇ ਇਹਨਾਂ ਨੋਕਤੇ ਉੱਤਮ ਨੇ ਹੋ ਨੇ ਅਤਿਆント ਜਰੇ ਆਤ ਦੇ ਹਤਿਆ ਦੇ ਆਤ ਕੋਈ ਲੱਭੇ ਦੀ ਰਹੀਆ ਆਪਾਂ ਕਹਿੰਦੇ ਆ ਤੁੱਕੀ ਹੋਈ ਹੈ ਜਾਂ ਤੁੱਕੀ ਹੋਈ ਹੈ ਮਹਾ ਤੁੱਕੀ ਕੋ ਰੋਤਾ ਨਿੰਦਕ ਕਿਨ ਟੇਕਰ ਨਾ ਪਾਈ ਹੱਤ ਕਰ ਨਾ ਨਾ ਪਾਈ ਫਿਸਕਲਪਨੀ ਟਿਕਦਾ ਹੋ ਕੋਈ ਨਹੀਂ ਕਰਦਾ ਨੀ ਜਮੇ ਡਿੱਗਦੀ ਹੋ ਜਾਣਾ ਕਾਲੀਏ ਲੋ ਇਨ ਤੇ ਕਰਨਾ ਭਾਈ ਜਿੱਥੇ ਇਹ ਉਹਦੀ ਕਰਦਾ ਨਾ ਮਨ ਚਿਤ ਕਾਉਟੇ ਉਹਦਾ ਮਨ ਨਹੀਂ ਹਰਦਾ ਹਾਂ ਸੰਤ ਕਰਨਿੰਦਕ ਮਹਾ ਹਤਿਆਰਾ ਸਤ ਹਤਿਆਰਾ ਹੁੰਦਾ ਮਹਾ ਹਤਿਆਰਾ ਹੁੰਦਾ ਹਤਿਆ ਦਾ ਘਰੂਗਾ ਹਤਿਆ ਸਰੀਰ ਦੀ ਦੇਵ ਨਸੀ ਉਹਦਾ ਬਾਲੀ ਦੇ ਦਾ ਹੀ ਕਰੂਗਾ ਉਹ ਦਲੀ ਦਾ ਕਰ ਦੂਗਾ ਵਾਹ ਵਾਹ ਵਾਹ ਦਾ ਬੁੱਧ ਦਾ ਨਾਸ ਕਰਦਾ ਉਹਦਾ ਬਿੱਟੀ ਜਿਆਦਾ ਹੋਰ ਵੀ ਕਰੂ ਉਹ ਸਾਰੀ ਕਈ ਜਨਮਾਂ ਦੀ ਕਮਾਈ ਦਾ ਹਾਂ ਸਤ ਗੁਰ ਨੇ ਇੰਦਕ ਪਰਮੇਸ਼ਰ ਮਾਰਾ ਸਤ ਗੁਰ ਨੇ ਨੰਦੋ ਤਾਂ ਸੱਚੇ ਨੰਦ ਗੁਰ ਤੇ ਪਰਮੇਸ਼ਰ ਦੀ ਮਾਰ ਹੁੰਦੀ ਉਹ ਕੀ ਹੁੰਦੀ ਹੈ ਕੀੜੇ ਮਕੌੜੇ ਦੇ ਨੇ ਉਹ ਵੀ ਧੋਖੇ ਜੇ ਬਣਾਉਂਦੇ ਮਜੂਰ ਦਾ ਧੋਖੇ ਕਿਥੋਂ ਲੈ ਕੇ ਆਵੇ ਉਹ ਬਣਾਉਣਾ ਜੇ ਅੰਧੇ ਕਾਰਨ ਜੇ ਦਵਾਈ ਦੇ ਉਹ ਕਹਿੰਦਾ ਪਰਮੇਸ਼ਰ ਦੀ ਮਾਰ ਰੂਹੀ ਕੋਈ ਨਹੀਂ ਮੈਨੂੰ ਇਹ ਬੰਦੇ ਵਿਚਾਈ ਦਿੰਦੇ ਆਉਣ ਦੋ ਇਹਨਾਂ ਵੀ ਕਰੋ ਸਰੀ ਜਾਓ ਤੁਸੀਂ ਈਮਾਨ ਹੋਏ ਚਾਹੀਦੇ ਆ ਨਾ ਵੀ ਚਾਹੀਦਾ ਪਾਪ ਸੰਤ ਕਾ ਨਿੰਦ ਕ ਤੇ ਹੀਨ ਸੰਤ ਕਾ ਨਿੰਦ ਕ ਜਿਹੜਾ ਮਹਾ ਅਤੈਆ ਉਹ ਲਹਾ ਤਿਆਰ ਸੱਚਾ ਦੀ ਕਰਦਾ ਅੱਜ ਅਕਾਜ਼ਾ ਦਾ ਜੋ ਗੁਰੂ ਜੀ ਨੇ ਇਹ ਰਜੋਗ ਉਹਨਾਂ ਨੇ ਸੱਤ ਦੇ ਜਲੇ ਨੇ ਇਹ ਰਗ ਮੋੜੇ ਇਹ ਆਦੀ ਅੱਜ ਆਦਾਂ ਕੋ ਕੌ ਕੌ ਦੀ ਅੱਜ ਆਸੀ ਦਾ ਗਾਉਂਦਾ ਜੇ ਕੌਂ ਜਦੋਂ ਆ ਬੁੱਧੀ ਕਿੱਥੇ ਹੋ ਜਾਂਦਾ ਨੇ ਐ ਸੰਤ ਵੀ ਕੌੜੂ ਵਰਗੇ ਕਿੱਥੇ ਇਹ ਬਾਰੇ ਜਿੱਤੇਆਂ ਅੰਦਰੋਂ ਜਿੱਤੇ ਹਾਂ ਚਿੱਟੇ ਜਨਕੇ ਕੱਪੜੇ ਅੰਦਰੋਂ ਕੌਣ ਹੈ ਜ਼ਾਰੇ ਬਾਹਰੋਂ ਚਿੱਟੇ ਨੇ ਕੱਪੜੇ ਪਾਗੇ ਇਹ ਹੋ ਜਾਂਦਾ ਨੇ ਕੌਣ ਕੌਣ ਇੱਕੋ ਬੋਲੀ ਬੋਲਦੇ ਨੇ ਕਾਂ ਕਾਂ ਕਰਕੇ ਤੇ ਕਰਦੇ ਨੇ ਜਿਆਦਾ ਨੁਕਸਾਨ ਕੀ ਦਾ ਕਰਦਾ ਨੇ ਸੱਤ ਦੋਤ ਜਿਹੜੀ ਇਹਨਾਂ ਦੀ ਸੱਤ ਦਾ ਉਹਦਾ ਹੀ ਨੁਕਸਾਨ ਕਰ ਸਕਦੇ ਨੇ ਦੂਏ ਦਾ ਨਹੀਂ ਕਰ ਸਕਦੇ ਦੂਏ ਦਾ ਕੀ ਕਰੇਗਾ ਨਾ ਜਿਹੜੇ ਇਹਨਾਂ ਦੇ ਨੇੜੇ ਆਉਣਗੇ ਉਹ ਇਹਨਾਂ ਦੇ ਸੁਣੇ ਹੋਣ ਉਹਨਾਂ ਨੂੰ ਬੋੜਦੇ ਵਿਸ਼ਵਾਸ ਕਰੀਏ ਵਿਸ਼ਵਾਸ ਕਰਤਾ ਹੈ ਏ ਬਹਾ ਅਧਿਆਰਾ ਵਿਸਾਦ ਕਾ ਪੀਨ ਗਿਆ ਹੋਇਆ ਕਹਿੰਦੇ ਨੇ ਤੁਹਾਡਾ ਭਾਗਸਾ ਕਰਪਾ ਕਰਾਵਾਂਗੇ ਬਾਹ ਫੜ ਕੇ ਲੈ ਜਾ ਮੈਂ ਨੇ ਉੱਥੇ ਜੇ ਕੱਢਣ ਵਾਲਾ ਕੋਈ ਹੋਵੇ ਜੀ ਤਾਲੀਕਾਰ ਚ ਤਾਲੀਕਾਰ ਚ ਜਾ ਕੇ ਕਾਢੀ ਤਾਂ ਇਹ ਅਕਸਰਾਂ ਦਾ ਜੋ ਕਰ ਰਹੇ ਨੇ insan ਗੁਰਮੁਖ ਦੇਖ ਦਿਖਾਏ ਇਸ ਤਰੀਕੇ ਨਾਲ ਸ਼ਾਇਦ ਕੋਈ ਸੰਭਾਵੀ ਹੁੰਦਾ ਇਹਨਾਂ ਨੂੰ ਦੱਸ ਦੇ ਭਾਇਆ ਹੁੰਦਾ ਇਹਨਾਂ ਨੂੰ ਨਾਲਾਂ ਨੂੰ ਵੀ ਇਹਦਾ ਦੱਬਾਛਾ ਦਿਖਾਇਆ ਰਾਜ ਤੇ ਹੀਨ ਰਾਜ ਤੇ ਹੀ ਸੰਤ ਦਾ ਨਿੰਦਕ ਦੁਖਿਆਰ ਦੀਨ ਆ ਸੰਤ ਕਾ ਜਲਾ ਦੁੱਧ ਰਾਜ ਤੇ ਹੀ ਉਹ ਤਾਹੀ ਦਾ ਰੋਜ਼ ਰਾਜ ਕਰੇਗਾ ਖਾਲਸਾ ਦੇ ਨਾਲੇ ਰਾਮ ਨੇ ਰਾਜਾ ਰੋ ਮੜ ਕੇ ਸੋ ਜਾਵੇ ਤਾਂ ਸੱਤ ਦੇ ਦੁੱਧ ਉਹ ਬਰਨ ਰਾਜ ਇਹ ਇਹਦਾ ਰਾਜ ਤੇ ਇਹਨਾਂ ਦੇ ਹਨਗੇ ਉਹ ਰਾਸ਼ੀ ਦਾ ਆਇਆ ਨਿਆਣ ਮੜਲਾਂ ਉਹ ਸਖ ਸਾਰੀ ਬਣੀ ਮੜਲਾ ਨਾ ਦਾ ਖੀ ਭੂਕਾ ਇਹਦਾ ਸੰਧਾਰੀ ਮੰਗਦੇ ਨੇ ਉਹ ਵੀ ਨਹੀਂ ਵਰਦਾ ਆਪਣਾ ਸ਼ੀ ਦੀ ਗੱਲੇ ਆਪਣਾ ਸ਼ੀ ਦੀ ਦਾ ਵੀ ਮੰਗਦੇ ਨਹੀਂ ਹੈ ਉਹ ਦੀ ਨਾ ਤੇ ਮੰਗਦੇ ਨੇ ਦਾ ਸਾਰੀ ਵਾਸਤੇ ਲਾੜਾ ਸਿੱਧੀ ਜਾਂਦੇ ਨੇ ਉਹ ਵੀ ਨਹੀਂ ਇਹਨਾਂ ਦੀ ਕੋਈ ਪੁੱਛਦਾ ਹਾਂਜੀ ਸੰਤ ਕੇ ਨਿੰਦਰ ਦੁਖੀਆ ਅਰਦੇਨ ਸਤ ਗਰ ਅੰਦਰ ਔਰ ਦੇ ਆ ਦੁਖੀਆ ਕੁਰੀਬ ਅਵਸਥਾ ਸੀਨਾ ਕੋ ਚਾਰਾ ਦੀ ਜੀਦਾ ਅਸੋਤ ਹਾਂਜੀ ਸੰਤ ਕੇ ਨਿੰਦਰ ਕੋ ਸਰਬ ਰੋਗ ਸਤ ਗਰ ਅੰਦਰ ਕੋ ਸਰਬ ਰੋਗ ਬਗਿਆ ਸਰ ਰੋਗ ਨਹੀਂ ਨਾ ਸਤ ਹੋਵੇ ਨਾ ਸੰਤ ਕੇ ਨਿੰਦਰ ਕੋ ਸਦਾ ਵਿਯੋਗ ਜਿਹੜਾ ਸੰਸਕਾਰ ਨੂੰ ਸੰਤ ਦਾ ਸਦਾ ਹੀ ਯੋਗੀ ਹੈ ਉਹ ਕੱਲਾ ਯਾਰ ਦਾ ਦੁਆ ਕੋਈ ਹੈ ਨਹੀਂ ਸੰਤ ਕੀ ਨਿੱਦਾ ਦੋਖ ਮੈਂ ਦੋਖ ਉਹਦੇ ਨਾਲ ਦੁਆ ਕੋਈ ਹੈ ਨਹੀਂ ਉਹਦਾ ਆਪਣਾਈ ਦੁਆ ਨਾਲ ਦਾ ਮਹਾਰਜ ਜਿੱਤੇ ਦੋ ਇੱਕ ਦੀਆਂ ਦੁਆ ਦੋ ਦਿਨ 1200 ਹੋਰ ਕੀ ਗੱਲ ਉਹ ਆਪਣੇ ਮੂਲ ਨਾਲ ਇਕ ਨਹੀਂ ਲੋਕ ਉਹ ਤਾਂ ਆਪੇ ਦਾ ਹੋਵੇ ਬਿਓਗੈ ਰਾਮ ਬਯੋਗੀ ਰਹਿੰਦਾ ਉਹ RAM ਬਯੋਗੀ ਨਾ ਜੀਏ ਜੀਏ ਜੀਏ ਨਾ ਉਹ ਜੱਗ ਮੰਨਦਾ ਰਹਿੰਦਾ ਹਾਂਜੀ ਸੰਤ ਕੀ ਸੰਤ ਕੀ ਨਿੱਦਾ ਦੋਖਵੇਂ ਦੋਖ ਸੰਤ ਕੀ ਨਿੱਦਾ ਜਿਹੜੇ ਹੋਰ ਕਮੀਆਂ ਨੇ ਉਹ ਹੋਰ ਕਮੀਆਂ ਹੋ ਜਾਂਦੀ ਹੈ ਪਹਿਲਾਂ ਹੀ ਦੋਖ ਬਥੇਰੇ ਨੇ ਵਿੱਚ ਸੰਤ ਕੀ ਨਿੱਦਾਗਾ ਤਨ ਆਹੋ ਦੋਖ ਦਾ ਦੋਖ ਸਾਧ ਜਾਂਦੇ ਬੈਠ ਰਹੀਆਂ ਅਗੀ ਬਾਗੀ ਗੇਤਗਾਰ ਸੰਤ ਕੇ ਨੇ ਦਾ ਦੋਖ ਮੈਂ ਦੋਖ ਆਹੋ ਛੁੱਕਾ ਤਾਂ ਪਹਿਲਾਂ ਹੀ ਕਰਨੀ ਹੁਣ ਫੇਲ ਹੋ ਗਈ ਅੰਦਰ ਆਤਮਾ ਜੇ ਚਾਹੂਗੀ ਨਾ ਆਪਣੇ ਅੰਦਰ ਸੰਤ ਨਹੀਂ ਜਾਗਦਾ ਉਹ ਮੈਂ ਹਾਂ ਨਾਲੇ ਦਾ ਉਸ ਕਾ ਨਾ ਨਾਨਕਾਂ ਨੇ ਵੀ ਜਿਹੜੇ ਉਹਦੇ ਅੰਦਰ ਜਿਹੜਾ ਸੰਤ ਉੱਠਾ ਕੰਮ ਕਰ ਲੱਗਿਆ ਹਾਂ ਉਹ ਉਹ ਜਿਹਨੇ ਛੱਡ ਦੇਵੇ ਸੰਦੁਖ ਜਣਾ ਛੱਡ ਦੇ ਉਹ ਵੀ ਮਤਲਬ ਤਾਂ ਮੁਕਤੀ ਇਹਨੂੰ ਉਹਨੇ ਲੋਕਾਂ ਨਾਲ ਕਪਰੋ ਕੀਤਾ ਹੋਇਆ ਸੰਤ ਉਹਦੇ ਅੰਦਰ ਉਹਦਾ ਬਰਾਮ ਹੋ ਗਿਆ ਜਿਹੜਾ ਸੋਨੇ ਦੇ ਮਗਰ ਮੇਰੇ ਮੋੜ ਸੋਨੇ ਦੇ ਫਰਕ ਉਹ ਭੱਜਿਆ ਸੀ ਨਾ ਇਹੋ ਐਜਾ ਰੰਗ ਆਦਾ ਤੇ ਉਹ ਜਾ ਜਾ ਰਾਮਾ ਤੇ ਸੀਤਾ ਜਾਊਗੇ ਜੀ